ਸ਼ਲੋਕ ਮਹੱਲਾ ਤੀਜਾ ਜਿਨਿ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ ਨਾਨਕ ਜੰਪੂਰ ਬੱਦੇ ਮਾਰੀਐ ਜੁਸੰਨੀ ਉਪਰਚੋਰ ਜਿਹੜੀ ਲੋਕ ਬਸਾਰ ਜਿਹਨਾਂ ਨੇ ਕਹੇ ਹੁਕਮ ਬਸਾਰਤਾ ਲੋਕ ਕਰਮ ਕਮਾਵੈ ਹੋਰ ਹੋਰ ਹੋਰ ਧਰਬ ਦੇ ਕਰ ਹੋਰ ਹੋਰ ਕਰਨ ਲੱਗੇ ਕੋਈ ਕਰ ਸੇਵਾ ਨੂੰ ਲੱਗਿਆ ਕੋਈ ਕੋਚਲਾ ਗਿਆ ਕੋਈ ਲੰਗਰ ਚਲਾਉਣ ਲੱਗ ਗਿਆ ਕੋਈ ਕੋਈ ਦੋਨੇ ਗੁਰਦੁਆਰੇ ਬਣਾਉਣ ਲੱਗ ਗਏ ਜਿਸਨੇ ਕੋਈ ਖੋਲ ਲਿਆ ਜੀ ਆਸ ਗੀਤ ਵਿਦਿਆਲਿਆ ਤੇਰਾ ਕੁਛ ਸਰਵਰ ਕੋਕਾ ਕਿਸੇ ਨੇ ਦੁੱਖ ਪੰਜਣੀ ਸਾਹਿਬ ਜਿਹੜਾ ਸਥਾਨਕ ਮੰਨਦੇ ਆ ਉਹਦੇ ਥੱਲੇ ਅਖੰਡ ਪਾਠ ਕਿਸੇ ਨੇ ਉਹ ਕੰਮ ਸ਼ੁਰੂ ਕਰ ਲਿਆ ਹਾਂ ਜੀ। ਹਾਂ ਜੀ ਆਹ ਕੁਝ ਕੁਝ ਕਰ ਲਏ ਆਪਣੇ ਮਰਜ਼ੀ ਦੇ ਕਰ ਲਏ ਗੁਰੂ ਨੂੰ ਕਿਸੇ ਨੇ। ਪੁੱਛੇ ਕਿ ਇਹਨੇ ਸਾਲ ਰੁਕਣਾ ਪੈਣਾ ਜੇ ਅੱਜ ਕਿਸੇ ਨੇ ਅਖੰਡ ਪਾਠ ਕਰਾਉਣਾ 20 ਸਾਲ ਤਾਂ ਬੁੱਕ ਹੋ ਗਏ ਜੀ ਉੱਥੇ। 20 ਸਾਲ ਨੂੰ ਤਾਂ ਕਿਸੇ ਨੇ ਮੰਨਣਾ ਹੀ ਨਹੀਂ ਹੈ। 20 ਸਾਲ ਨਹੀਂ ਹਟੜਿਆਂਗੇ। ਮੰਨਣਾ ਹੀ ਨਹੀਂ ਕਿਸੇ ਨੇ 20 ਸਾਲ ਤੋਂ ਬਾਅਦ। 20 ਸਾਲ ਤੇ 5 ਸਾਲ ਨੂੰ ਹਟ ਜਾਣਗੇ ਆਪੇ। ਕਹਿੰਦੇ ਹਾਂ ਠੀਕ ਹੈ ਜੀ ਜਿਵੇਂ ਹੁਣ ਪ੍ਰਚਾਰ ਔਰ ਜਾਗਰਤੀ ਆ ਰਹੀ ਹੈ ਹੌਲੀ ਹੌਲੀ ਹਟ ਜਾਣਗੇ ਹੈ ਜੀ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜੰਮਪੁਰ ਵੱਧੇ ਮਾਰੀਆਂ ਨਿਉਸੰਨੀ ਚੋਰ ਨਾਨਕ ਜੰਮਪੁਰ ਵੱਧੇ ਮਾਰੀਆਂ ਜੰਮਪੁਰ ਵੱਧੇ ਜਿਵੇਂ ਕੋ ਥਾਣੇ ਵਾਲੇ ਫੜਕੇ ਲੈ ਜਾਂਦੇ ਨੇ ਘੁੱਟ ਪੈਂਦੀ ਹੈ ਇੰਨਾ ਕਹਿੰਦੇ ਲੈ ਜਾਣਗੇ ਕੋਟ ਪਹੂਗੀ ਕਿਉਂਕਿ ਬਈ ਕੋਟ ਦੇਉਂ ਕਹਿੰਦੇ ਜੇ ਮੈਂ ਚੋਰ ਸੰਦੇ ਉੱਤੋਂ ਹੀ ਫੜਿਆ ਜਾਂਦਾ ਨਾ ਉਹ ਤਾਂ ਬਿਲਕੁਲ ਜੋਰ ਪੱਕਾ ਹੁੰਦਾ ਹੈ ਅਲਜਾਮ ਨੀਲਾ ਵੀ ਜੋਰ ਇਹਨੇ ਕੀਤੀ ਹੈ ਬਿਲਕੁਲ ਉੱਤੋਂ ਫੜਿਆ ਸੰਦੇ ਹੂੰ ਸੱਦੀ ਉੱਪਰ ਚੋਰ ਸੰਨ ਲਾਉਣਾ ਹੀ ਚੋਰ ਫੜਿਆ ਗਿਆ ਇੱਕ ਕੰਮ ਕਰਦਾ ਹੀ ਫੜੇ ਕਹਿੰਦੇ ਨਾਮਰੂ ਛੱਡ ਕੇ ਜੋ ਹੋਰ ਕੰਮ ਧਰਮ ਦੇ ਧਰਮ ਦੇ ਇਹ ਸੱਦੀ ਉੱਪਰ ਚੋਰ ਐ ਸਾਰੇ ਉਹ ਕਿੱਡਾ بڑا ਇਲਜ਼ਾਮ ਹੈ ਗੁਰਬਾਣੀ ਲਾਉਂਦੀ ਇਨ੍ਹਾਂ ਉੱਤੇ ਜੰਮ ਪਰ ਮਾਰੀਆਂ ਹੈ ਜੋ ਸੱਡੀ ਉੱਪਰ ਚੋ ਐਡੋ ਬੜਾ ਇਲਜ਼ਾਮ ਹੋਰ ਕੀ ਹੋਊਗਾ ਉਹ ਹਜਾ ਹਾਲ ਹੋ ਇਹਨਾਂ ਦਾ ਹੋ ਜਿਹੜੇ ਕਿ ਨਾਮ ਨੂੰ ਵਿਸਾਰ ਕੇ ਹੈ ਕੰਬ ਲਗੇ ਨੇ ਧਰਮ ਦੇ ਕੰਬ ਸਿੱਖੀ ਚ ਉਹਦੇ ਬਰਾਬਰ ਇਹ ਹੈ ਇਹਨੂੰ ਰੱਖਿਆ ਗੁਰਬਾਣੀ ਦੇ ਸਾਡੇ ਵੱਲੋਂ ਦਾ ਕੁਝ ਨਹੀਂ ਅਸੀਂ ਕਹਿ ਰਹੇ ਜੀ ਦੀ ਵਿਆਖਿਆ ਕਰੀਏ ਤਾਂ ਅਸੀਂ ਸਾਹਮਣੇ ਰੱਖਿਆ ਜੀ ਕਰੀ ਜਾਣ ਗੱਲ ਨਾ ਕਹਿਣਾ ਨਹੀਂ ਅਸੀਂ ਗੁਰੂ ਨਾਲ ਜੋੜਦੇ ਆ ਬਾਣੀ ਤਾਂ ਆ ਜੋੜੋ ਇਹ ਇਹ ਗੱਲ ਹੈ ਜੁੜਿਆ ਕੋਈ ਆ ਨਾਲ ਕਿਉਂ ਜੋੜਿਆ ਤੁਸੀਂ ਭਗਤੀ ਕੀ ਕਹਿੰਦੀ ਹੈ ਨਾਲ ਕਿਉਂ ਦੀ ਜੋੜਿਆ महला ਮਹੱਲਾ ਪੰਜਵਾਂ ਧਰਤੀ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰ ਨਾਮ ਨਾਨਕ ਨਾਮ ਵਿਹੂਣਿਆ ਤਿੰਨ ਤਨ ਖਾਵੈ ਕਾਉ ਦੇਖੋ ਧਰਤ ਸੁਹਾਵੜੀ ਕਿੱਥੇ ਮਰਜੀ ਬੈਠ ਕੇ ਨਾਮ ਜਪ ਲੋ ਉਹੀ ਧਰਤ ਚੰਗੀ ਸੁਹਾਵੜੀ ਕੋਈ ਫਰਕ ਨਹੀਂ ਪੈਂਦਾ ਮੇਰੀ ਥੱਲੇ ਪਾਠ ਇਸ ਸਾਰੇ ਨੂੰ ਦੇ ਪਲੇਟੇ ਪਾਏ ਹੋਏ ਨੇ ਸੰਧ ਤੁ ਨੂੰ ਪਤਾ ਹੈ ਨਹੀਂ ਆਕਾਸ਼ ਨੂੰ ਉਹ ਆਕਾਸ਼ ਵੀ ਸੁਣਦਾ ਜਿਹਦੇ ਥੱਲੇ ਬੈਠੇ ਹਾਂ ਚੱਪਲ ਤੇ ਹੱਲ ਨੂੰ ਜੇ ਵਾਕਈ ਹੱਲ ਨੂੰ ਚਪਿਆ ਜਾਂਦਾ ਹੋਵੇ ਜਿੱਥੇ ਬੈਠੇ ਹੋਈ ਤਦ ਸਵਾਭ ਨਹੀਂ ਉਹ ਹੀ ਆਕਾਸ਼ ਉੱਤਲਾ ਜਿੱਥੇ ਨਾ ਉਹ ਜਾਂਦਾ ਤਾਂ ਕਿਹੜੀ ਤਾਂ ਜਗ੍ਹਾ ਰਹੇਗੀ ਕਿਹੜਾ ਮਹੱਤਵ ਅਲੱਗ-ਅਲੱਗ ਥਾਂ ਦਾ ਰਹਿ ਗਿਆ ਜਿਹੜੇ ਨੂੰ ਪਵਿੱਤਰ ਥਾਂ ਇਹ ਸਭ ਲਾਇਆ ਕਰਕੇ ਦੁਕਾਨਦਾਰੀ ਕਰਕੇ ਕੀਤਾ ਹੈ ਸਰ ਇਹ ਜੀ ਸਾਰੇ ਤੀਰਥ ਦਵਸਤ ਹੋ ਗਏ ਜੀ ਕੋਈ ਤੀਰਥ ਦੀ ਕੋਈ ਇੰਪੋਰਟੈਂਸ ਨਹੀਂ ਅੱਖ ਵੀ ਰਹਾ ਅੱਖ ਨੂੰ ਨਹੀਂ ਪਹਿਲਿਆਂ ਦੇ ਕੀਤੇ ਸਾਡੇ ਤਾਂ ਥੇਈ ਦੀ ਇਹ ਤਾਂ ਉਹਨੇ ਬਾਅਦ ਚ ਬਣਾ ਲਏ ਨਾਨਕ ਨਾਮ ਵੀ ਖਾਵੇ ਕੌ ਨੂੰ ਕੌ ਨੇ ਕੌ ਨੂੰ ਇਹ ਨਾ ਦੇ ਸਰੀਰ ਨੂੰ ਆ ਬੋਲ ਜਾਨਾ ਜਿਹੜਾ ਇਹ ਖਾਤੇ ਕੌ ਕਾਲਾ ਇਹ ਸਾਰਾ ਸਰੀਰ ਖਾ ਜਾਣੇ ਨੇ ਕਾਗਾ ਆ ਖਾਇਆ ਸਗਲਾ ਮਾਸ ਇਹ ਮਾਨਾ ਕਰਾਉਂਦਾ ਸਾਰੇ ਖਾਰੇ ਵਿਆਹ ਕਰ ਲੋ ਉਹ ਕਰ ਲੋ ਵਾਸਤੇ ਮਾਇਆ ਵਾਸਤੇ ਇਹ ਸਾਰਾ ਸਰੀਰ ਇਸ ਨੇ ਖਾ ਜਾਣ ਕਹੋ ਜੀ ਠੀਕ ਹੈ ਜੀ ਇਹ ਕੌ ਆ ਹੈ ਜੀ ਉਹ ਜਿਹੜਾ ਸਾਰੀ ਕੌ ਆ ਕਾਲਾ ਕੌ ਕਾਲਾ ਕੌਂ ਕਰੇ ਕਿੰਨਾ ਹੁੰਦਾ ਜਿੱਤੇ ਮਜੀਦ ਨੂੰ ਹਲੋਇ ਨੂੰ ਹਾਂਜੀ ਪਰ ਜੇ ਕਹਿੰਦੇ ਕਿਆ ਹੰਸ ਕਿਆ ਬਗਲਾ ਜਿਸ ਕੋ ਨਜ਼ਰ ਕਰੇ ਜੇ ਉਸ ਭਾਵੇਂ ਤੇ ਕਹਿੰਦੇ ਹੁੰਦੇ ਕੱਢ ਕੇ ਦਿਖਾਉਣ ਇਧਰੋਂ ਨਿਕਲਦੇ ਨੇ ਸਤਕੁਰ ਜਿਹੜਾ ਹੈਗਾ ਅਮਰਤ ਸਰੋਵਰ ਹੈ ਉਹਦੇ ਵਿੱਚੋਂ ਹੀ ਕਾਂਗਰਸ ਬਣ ਕੇ ਨਿਕਲਦੇ ਹੁੰਦੇ ਨੇ ਕਾਉ ਪੜੰਗੈ ਇਹਨੂੰ ਕਾਉ ਲਿਖਿਆ ਹੋਇਆ ਕਾਉ ਪੜਿਆ ਜਾਊਗਾ ਕਾਉ ਨੇ ਪੜਿਆਊ ਕਾਉ ਕੀ ਹੈ ਪਿੱਟੀਆਂ ਤਾਂ ਹੁੰਦੀਆਂ ਹੀ ਨਹੀਂ ਸੀਆਂ ਸਿੱਲੀ ਕੋਲੋਂ ਜਿੱਥੇ ਲੋੜਾ ਲੋੜੀ ਬਹੁਤ ਵੀ ਸਾਡੀ ਠੀਕ ਹੈ ਜੀ ਪਰ ਇਹ ਸਾਫ ਪਤਾ ਵੀ ਇਹ ਵਾਸਤੇ ਕਹੀ ਗਈ ਗੱਲ ਹੈ ਕਾਉ ਜੋ ਹੈ ਉਹ ਮਨ ਹੈ ਤਨ ਹਿਰਦਾ ਹੋ ਗਿਆ ਹੈ ਜੀ ਹਾਂ ਜੀ ਤੇ ਇਹਦੇ ਬਾਬਾ ਫਰੀਦ ਦੇ ਸ਼ਲੋਕ ਵੀ ਸਾਫ ਹੋ ਜਾਂਦਾ ਜਦੋਂ ਕਹਿੰਨੇ ਆ ਕਾਗਾ ਕਰਨ ਟੰਡੋਲੇ ਸਗਲਾ ਖਾਇਆ మాਸ ਹਾਂ ਹਾਂ ਹਾਂ ਇਹ ਤੋਂ ਨਾਨਾ ਮੱਥੂਏ ਅੱਖਾਂ ਬਾਲੂ ਇਸ਼ਾਰਾ ਕਰਕੇ ਕੌਣ ਪਿਛਾੜਦਾ ਉੱਤੇ ਕੋਈ ਪੌੜੀ ਨਾਮ ਸਲਾਹਣ ਭਾਉ ਕਰ ਨਿਜ ਮਹਿਲੀ ਵਾਸਾ ਓਏ ਬਹੁੜ ਜੂਨ ਨਾ ਆਵਨੀ ਫਿਰ ਹੋਏ ਨਾ ਬినాਸਾ ਜਦ ਗੁਰਮੁਖੀ ਕਾਲ ਚੱਲ ਪਈ ਪ੍ਰੇਮ ਕਰਕੇ ਜਿਹੜੇ ਹੁਕਮ ਦੀ ਸਿਰਫ ਸਲਾਹ ਕਰਦੇ ਨੇ ਨਾ ਨਾ ਹੁਕਮ ਐ ਦੋ ਹਾਂਜੀ ਸਾਡੀ ਜਿਹੜਾ ਅਸੀਂ ਹੁਕਮ ਰੱਖ ਸਕਦੇ ਹਾਂ ਹੁਕਮ ਦੀ ਜਿਹੜਾ ਨਾਮ ਰੱਖ ਸਕਦੇ ਆ ਕੋਈ ਗੱਲ ਹੁਕਮ ਦੀ ਸਿਰਫ ਸਲਾਹ ਕਰਦੇ ਨੇ ਨਾਮ ਦੀ ਸਿਰਫ ਸਲਾਹ ਕਰਦੇ ਨੇ ਜਿਹੜੇ ਪਾਉ ਕਰਦੇ ਪ੍ਰੇਮ ਕਰਦੇ ਦਾ ਆਪਾਂ ਫਿਰ ਮਨੋਰਚਿਤਿਕ ਕਰਕੇ ਹੋ ਬਹੁਤ ਪ੍ਰੇਮ ਕਰਦੇ ਸਹੀ ਨਿਜ ਮਹਿਲੀ ਵਸਾ ਦੇ ਵਿੱਚ ਫਿਰਦੇ ਦੀ ਵਸਤਾ ਹੋ ਜਾਂਦੀ ਦੇ ਮਹਿਲੀ ਡਿਜ ਘਰ ਵਾਸਾ ਹੋ ਜਾਂਦਾ ਸੱਚ ਕਰਨ ਦੇ ਵਾਸੀ ਹੋ ਜਾਂਦੇ ਨੇ ਉਹ ਕੋਈ ਬਾੜ ਜੋਂ ਆਵਦੀ ਉਹ ਨਹੀਂ ਦੁਆਰਾ ਜੋਂ ਉਹਦੇ ਦੁਆਰਾ ਤਿਰਕੁਟੀ ਚ ਮਰੂ ਆ ਕੇ ਜੋਂ ਉਹਨੂੰ ਜਿਹੜਾ ਤਿਰਕੁਟੀ ਸੋਚਦਾ ਸੋਚਦਾ ਥਰੀ ਛੱਡਦਾ ਉਬਰਦਾ ਮਾਇਆ ਨਾਲ ਜੁੜਿਆ ਹੋਇਆ ਮਾਰਦੇ ਬੋਹ ਨਾਲ ਜੁੜਿਆ ਸੀ ਛੱਡਦਾ ਉਬਰਦਾ ਭੈ ਵਿੱਚ ਮਰਦਾ ਥਰੀ ਛੱਡਦਾ ਉਬਰਦਾ ਉਹ ਜੰਮਦਾ ਦੁਆਰਾ ਕੋਈ ਬਾੜ ਜੋਂ ਆਵਦੀ ਫਿਰ ਹੋਏ ਨਾ ਉਹ ਇਹ ਨ ਬਿਨਾਸਾ। ਫੇਰ ਉਹ ਦਾ ਨਾਸ ਨਹੀਂ। ਉਹ ਦਾ ਨਾਸ ਨਹੀਂ। ਉਹ ਦਾ ਗਿਆਨ ਦਾ ਨਾਸ ਨਹੀਂ, ਉਹ ਦਾ ਉਹਦੀ ਸੁਰਤ ਦਾ ਨਾਸ ਦੀ ਹੁੰਦਾ। ਬੁੱਧ ਦਾ ਨਾਸ ਦੀ ਹੁੰਦਾ। ਸਹੀ। ਕਹਿੰਦਾ ਪਾਵਾ ਬਨਾਸੀ ਹੋ ਜਾਂਦਾ ਹੈ ਜੀ। ਠੀਕ ਹੈ। ਤਾਂ ਆ ਨਿਜ ਮਹਿਲੀ ਵਾਸਾ ਇੱਥੋਂ ਵੀ ਪਤਾ ਲੱਗਦਾ ਕਿ ਗੁਰਬਾਣੀ ਚ ਮਹੱਲਾ ਵੱਖ ਕਿਉਂ ਵਰਤੇ ਆ? ਨਿਜ ਮਹਿਲ ਚ ਵਾਸਾ ਆ ਉਹਨਾਂ ਦਾ ਜਿੱਥੋਂ ਗੁਰਬਾਣੀ ਆ ਰਹੀ ਹੈ ਜੀ। ਹਾਂ ਹੈ ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ ਹਰ ਰੰਗ ਕਦੇ ਨਾ ਉਤਰੈ ਗੁਰਮੁਖੀ ਪ੍ਰਗਾਸਾ ਹਰ ਸੇਤੀ ਰੰਗ ਰਵ ਰਹੇ ਹਰ ਨਾਲ ਹਰ ਰੰਗ ਜੇ ਹਮੇਸ਼ਾ ਰਹਤੇ ਰਹਣੇ। ਜੇ ਹਰ ਦੇ ਰੰਗ ਜੇ ਰਹਨੇ ਨੇ ਆਪਣੇ ਮੂਰ ਨਾਲ ਜੁੜੇ ਰਹਨੇ ਨੇ ਉਹਦਾ ਹੀ ਰੰਗ ਜੇ ਰਹਨੇ। ਸਭ ਸਾਸ ਗਿਰਾਸਾ ਜਿੰਨੇ ਵੀ ਸਾਉਂਦੇ ਨੇ ਕਿੰਨੇ ਵੀ ਗਿਰਾਸਾ ਹੁੰਦੇ ਨੇ ਸਾਸੇ ਗਿਰਾਸਾ ਉੱਥੇ। ਹਾਂਜੀ ਸਰੀਰ ਤਾਂ ਉੱਥੇ ਹੈ ਹੀ ਨਹੀਂ। ਆਸਮਾਨ ਦਾ ਰਾਸ ਕੇ ਅਜਲੇ ਸ਼ੀਰ ਦਾ ਬਾਲੇ ਸ਼ੀਰ ਦਾ ਨਾਲ ਜਿਹੜੀ ਗੱਲ ਇੱਥੇ ਸਰ ਸਾਸ ਦੇ ਰਾਸਾ ਹਰ ਕਾ ਰੰਗ ਕਦੇ ਨਾ ਨੂੰ ਅੰਦਰ ਪ੍ਰਗਾਸ ਹੋ ਜਾਂਦਾ ਉਹਨਾਂ ਦੇ ਪ੍ਰਕਾਸ਼ ਨਹੀਂ ਉਹ ਤਾਂ ਗਿਆਨ ਦਾ ਗਿਆਨ ਦੀ ਰੋਸ਼ਨੀ ਹੋ ਜਾਂਦੀ ਹੈ ਗਿਆਨ ਪ੍ਰਚੰਡ ਹੋ ਜਾਂਦਾ ਉਹਨਾਂ ਦੇ ਅੰਦਰ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦੀ ਵਿਵਸਥਾ ਹੋ ਜਾਂਦੀ ਓਏ ਕਿਰਪਾ ਕਰਕੇ ਮੇਲੀਆਂ ਨਾਨਕ ਹਰਪਾਸਾ ਉਹ ਕਿਰਪਾ ਹੋਈਆ ਪਰਮੇਸ਼ਰ ਦੀਆਂ ਹੱਥੇ ਤਾਂਬਲਾ ਇੱਕ ਕੀਤੇ ਨੇ ਹੋਏ ਨਾਨਕ ਹਰਪਾਸਾ ਹਰ ਦੇ ਪਾਸੇ ਚ ਲਿਆ ਕੇ ਨਾਨਕ ਕਹਿੰਦਾ ਹਰ ਦੇ ਪਾਸੇ ਹੋ ਗਿਆ ਨਾਲੇ ਮਿਲ ਗਿਆ ਉਹਦੇ ਪਾਸ ਚ ਲਿਆ ਨਾਲ ਮਿਲ ਗਿਆ ਠੀਕ ਹੈ ਜੀ ਇੱਥੇ 26ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ